ਸੰਤਖ ਪਾਲ ਸਿੰਘ ਜੀ ਦਾ ਬਹੁਤ ਧੰਨਵਾਦ ਕਰਦਾ ਹਾਂ ਹੁਣ ਬਹੁਤ ਛੇਤੀ ਆਪਾਂ ਸਮਾਪਤੀ ਕਰ ਦੇਣੀ ਹੈ ਜੋ ਬੱਚਿਆਂ ਨੇ ਸਾਨੂੰ ਸਕਰੀਨ ਬਣਾ ਕੇ ਦਿੱਤਾ ਜਿੱਚ ਆਪਾਂ ਇਤਨੇ ਵੇਲੇ ਵੀ ਸੱਚੇ ਪਾਤਸ਼ਾਹ ਦੇ ਦਰਸ਼ਨ ਕੀਤੇ ਹਨ ਉਸ ਤੋਂ ਉਪਰੰਤ ਸੰਤਖ ਜਾਨ ਸਿੰਘ ਜੀ ਹੋਰ ਹੋਰ ਸਾਧ ਸੰਗਤ ਦੇ ਦਰਸ਼ਨ ਕੀਤੇ ਹਨ ਨਾਲ ਦੇ ਨਾਲ ਕੁਲਾ ਜੀ ਜੋ ਸੰਤਖ ਜਾਨ ਸਿੰਘ ਦੇ ਭਤੀਜੇ ਹਨ ਸਾਰਿਆਂ ਨੂੰ ਪਤਾ ਹੀ ਹੈ ਵੈਸੇ ਜੋ ਗਾਰੇ ਸਨ ਸੋ ਸੰਤ ਦਰਸ਼ਨ ਸਿੰਘ ਜੀ ਦੇ ਸੁਪੁੱਤਰ ਸਾਧਗੁਰੂ ਜੀ ਕੇ ਦੇ ਨਾਲ ਉਹ ਇਸ ਵੇਲੇ ਜੋ ਸੰਦਰਸ਼ਨ ਸਿੰਘ ਜੀ ਜਿਸ ਤਰ੍ਹਾਂ ਸੇਵਾ ਕਰਦੇ ਸੀ ਉਸੇ ਤਰ੍ਹਾਂ ਹੀ ਸ੍ਰੀ ਪੈਣੀ ਸਾਹਿਬ ਸਾਧਗੁਰੂ ਸੱਚੇ ਪਾਤਸ਼ਾਹ ਦੀ ਨਾਲ ਉਸੇ ਤਰ੍ਹਾਂ ਹੀ ਸੇਵਾ ਕਰ ਰਹੇ ਨੇ ਹੁਣ ਸੋ ਮੈਂ ਬਹੁਤਾ ਟਾਈਮ ਨਹੀਂ ਲੰਦਾ ਜਿਹੜਾ ਬੱਚਿਆਂ ਨੇ ਇਹ ਉਦਮ ਕੀਤਾ ਹੈ ਉਹਨਾਂ ਦੇ ਨਾਮ ਬੋਲਾਂਗਾ ਉਹਨਾਂ ਨੂੰ ਸਿਰੋਪਾਓ ਵਜੋਂ ਮਾਣ ਵਜੋਂ ਮਾਲਾ ਦਿੱਤੀ ਜਾਏਗੀ ਔਰ ਮੈਨੂੰ ਇਹ ਇਸ ਤਰ੍ਹਾਂ ਹੁਕਮ ਹੋਇਆ ਸਾਡੇ ਵਿਦਕ ਜਥੇ ਦੇ ਪ੍ਰਧਾਨ ਉਹਨਾਂ ਵੱਲੋਂ ਔਰ ਮੈਂ ਸੰਤ ਗੁਰਤੇਜ ਸਿੰਘ ਜੀ ਚਾਨਾ ਉਹਨਾਂ પાસે ਬੇਨਤੀ ਕਰਾਂਗੇ ਇਹ ਮਾਲਾ ਤੁਸੀਂ ਦੇਣੀ ਹੈ ਸਭ ਤੋਂ ਪਹਿਲਾਂ ਕਾਕਾ ਸੰਤ ਗੁਰਬਖਸ਼ ਸਿੰਘ ਜੀ ਦਵਿੰਦਰ ਸਿੰਘ ਜੀ ਦਲਜੀਤ ਸਿੰਘ ਜੀ ਸਾਰੇ ਇੱਥੇ ਅੰਦਰ ਆ ਜਾਓ ਸਪਿੰਦਰ ਸਿੰਘ ਜਸਪਾਲ ਸਿੰਘ ਮੈਂ ਕੱਲਿਕਲੇ ਨਾਮ ਫੇਰ ਬੋਲਾਂਗਾ ਸਾਰੇ ਅੰਦਰ ਆ ਜਾਓ ਪਲੀਜ਼ ਪਰਮਜੀਤ ਸਿੰਘ ਹਰਦੀਪ ਸਿੰਘ ਬੋਲੇ ਸੋ ਨਿਹਾਲ ਸਤਿ ਇਹਨਾਂ ਬੱਚਿਆਂ ਦਾ ਬਹੁਤ ਧੰਨਵਾਦ ਹੈ ਨਾਲ ਹੋਰ ਵੀ ਜੋ ਬੱਚੇ ਜਿੰਨਾ ਵੀ ਸੇਵਾ ਕਰਦੇ ਨੇ ਉਹਨਾਂ ਸਾਰਿਆਂ ਦਾ ਧੰਨਵਾਦ ਕੀਤਾ ਜਾਂਦਾ ਹੈ ਸੰਤ ਗੁਰਤੇਜ ਸਿੰਘ ਦਾ ਜੀ ਜੋ ਸਾਡੇ ਇੱਥੇ ਸਾਊਥ ਆਲ ਦੇ ਸਖਤਰ ਹਨ ਉਹਨਾਂ ਦਾ ਵੀ ਬਹੁਤ ਧੰਨਵਾਦ ਹੈ ਹੁਣ ਇਸ ਤੋਂ ਉਪਰੰਤ ਜਿਨ੍ਹਾਂ ਸਾਡੇ ਗੁਣੀ ਜਨਾਂ ਨੇ ਇੱਥੇ ਸਾਧ ਸੰਗਤ ਨੂੰ ਸੰਤ ਖਜਾਨ ਸਿੰਘ ਜੀ ਦੀ ਸਰਦਾਂਦਲੀ ਵਿੱਚ ਸੰਗੀਤ ਦੁਆਰਾ ਹਿੱਸਾ ਲਿਆ ਹੈ ਉਹਨਾਂ ਨੂੰ ਸਿਰਪਾਉ ਦਿੱਤੇ ਜਾਣਗੇ ਮੈਂ ਸੰਸਦ ਵਜਨ ਸਿੰਘ ਜੀ પાસે ਬੇਨਤੀ ਕਰਦਾ ਕਿ ਉਹ ਇੱਥੇ ਆ ਜਾਣ ਮੈਂ ਕੱਲੇ-ਕੱਲੇ ਦਾ ਨਾਮ ਬੋਲਦਾ ਤੇ ਆਪ ਜੀ ਸਾਰਿਆਂ ਨੂੰ ਸਿਰਪਾਉ ਦੇਣ ਦੀ ਕਿਰਪਾਲਤਾ ਕਰਨੀ